बसंत वाणी रविदास जी की ੴ सतगुरु प्रसाद तुझे सुजनता कछु नाहीं पहरावा देखे खूब जाए तुझे सुजनता कछु न रे तद सोजी ता कुछ है दी किसे पदत नाल गल कीती है या किसे चारबक बंदे नाल कीती है तैनू नहीं है कोई बुझे वधिया ता कुछ नहीं सुझे कुछ नहीं है तैन ਸੋ ਜਾਂਦਾ ਸੋ ਜਦਾ ਕੋਈ ਹੈ ਦੀ ਪਹਿਰਾਵਾ ਦੇਖੇ ਹੁਬ ਪਹਿਰਾਵਾ ਦੇਖ ਲੈ ਸੰਤ ਸੰਤ ਹੈ ਮੱਥਾ ਟੇਕਦਾ ਜਾ ਕੇ ਲੋਕ ਇਹ ਵੀ ਕਰਦੇ ਨੇ ਜਿਹਨਾਂ ਨੂੰ ਸੋਚੀ ਨਹੀਂ ਹੈ ਉਹ ਪਹਿਰਾਵਾ ਦੇਖ ਕੇ ਜਾ ਮੱਥਾ ਟੇਕਦੇ ਨੇ ਬਹਾਪੁਰ ਖਲਜੀ ਬਹਾਪੁਰ ਖਲਜੀ ਬਹਾਪੁਰ ਖਲਜੀ ਜੇ ਕੋ ਸੋਚੀ ਹੈ ਉਹ ਗੱਲ ਕਰਦਾ ਉਹ ਮੱਥਾ ਬਾਅਦ ਚ ਟੇਕਦਾ ਜੇ ਦੇਖ ਲੈਂਦਾ ਵੀ ਵਿੱਚ ਵੀ ਹੈ ਕੁਝ ਸਾਰਿਆਂ ਨੂੰ ਮੱਥਾ ਟੇਕਣੋਂ ਪਹਿਲੇ ਦੇਖਦਾ ਲਓ ਵੀ ਡੱਬਾ ਖਾਲੀ ਹੋਇਆ ਕੀ ਹੈ ਵੀ ਜਦ ਵਿੱਚ ਭੰਗਾਰ ਤਾਂ ਦੀ ਭਰੀ ਹੋਈ ਪਰ ਉਹਦਾ ਕਲਚਰ ਬਾਰਾ ਪੀਟਰ ਭਰੀ ਪਵਾਜੇ ਵਿੱਚ ਭੰਗਾਰ ਹੋਈ ਉਹ ਤੇ ਕਿਲਾਣਾ ਹਾਂਜੀ ਠੀਕ ਹੈ ਜੀ ਇਹ ਤਾਂ ਅੱਜ ਕੱਲ ਦੇ ਹਾਲਾਤਾਂ ਦੀ ਵੀ ਗੱਲ ਹੈ ਜੀ ਅੱਜ ਕੱਲ ਵੀ ਇਸ ਤਰ੍ਹਾਂ ਹੀ ਹੋ ਰਿਹਾ ਜੇ ਉਦੇ ਵਾਸਤੇ ਤਾਂ ਕੋਈ ਜਗਾਈ ਨਹੀਂ ਕਿਤੇ ਨਾ ਇੱਥੇ ਨੂੰ ਉੱਥੇ ਸਰਕਾਰੀ ਵਾਸਤੇ ਜਦੋਂ ਤਾਂ ਉਹ ਬਣਾਵੇ ਤੇ ਹੀ ਉਲਟ ਖੜਾ ਹੈ ਵਿਰੋਧ ਚ ਖੜਾ ਹੈ ਇੱਥੇ ਉੱਥੇ ਤੂੰ ਕਹੜੇ ਪਹਿਰਾਵੇ ਦੇਖ ਕੇ ਭੁੱਲ ਗਿਆ ਉਹਦੇ ਸਰਕਾਰਿਓ ਦੇ ਤਾਂ ਤਾਂ ਲੋਕ ਕਹਦੇ ਪਹਿਰੀ ਅਖ ਲੋ ਤਾਂ ਹੀ ਲਾ ਲਾ ਬਹਿੰਦੇ ਨੇ ਤੇਰੀ ਗਰਦਨ ਉੱਪਰ ਲਵਾ ਕਾਉਂ ਕੁਝ ਹੈ ਜਾਂ ਕੌਂ ਹੈ ਜਾਂ ਤੇਰੀ ਗਰਦਨ ਤੇ ਕਾਲ ਹੈ ਉਹ ਹੈ ਜਾਂ ਤੇ ਕਾਲ ਹੈ ਕਾਲ ਸਾਰਿਆਂ ਦੀ ਗਰਦਨ ਤੇ ਇੱਕ ਹੀ ਹੈ ਕਾਉ ਦਾ ਮਤਲਬ ਕੌਂ ਹੈਗਾ ਕਿ ਕੁਝ ਹੋਰ ਹੈ ਜੀ ਕਾਉ ਖੁਗਵਾ ਕਾਲ ਅੱਛਾ ਜੀ ਠੀਕ ਹੈ ਵੀ ਤੇਰੇ ਸਿਰ ਪਰ ਕਾਲ ਮੰਡਰਾ ਰਿਹਾ ਹੈ ਰਿਹਾ ਕਾਲ ਤੇਰੇ ਸਿਰ ਤੇ ਸੋ ਜੀ ਤੂੰ ਕਾਇ ਗਰਬੇ ਬਾਵਲੀ ਜੈਸੇ ਭਾਦੂ ਕੁੰਭ ਰਾਜ ਤੂੰ ਤੇ ਸਤੇ ਖਰੀ ਉਤਾਬਲੀ ਰਹੋ ਤੂੰ ਕਾਇ ਕਰ ਬਾਬਲੀ ਤੂੰ ਕਿੱਥੇ ਦਰਬ ਹੋ ਗਿਆ ਤੈਨੂੰ ਮੇਰਾ ਫਰਾਨਾ ਗੁਰੂ ਆ ਉਹ ਗਾਰੇ ਨੂ ਗੁਰੂ ਬਣਾ ਕੇ ਉੱਥਾਰ ਟਾਈ ਵੀ ਪੈਦਾ ਕਰ ਲਿਆ ਬਾਬਲੀ ਤੈਨੂੰ ਕਾਹਦਾ ਹੰਕਾਰ ਆ ਵੀ ਮੇਰੀ ਦਾ ਬਹੁ ਫੜ ਕੇ ਲੈ ਜਾਂਦੇ ਨੇ ਉਹ ਤਾਂ ਬਾਲੇ ਕਿੱਡੇ ਕੱਪੜੇ ਕਿਹੜਾ ਲੈ ਲਿਆ ਬਣਾ ਜੈਸੇ ਬਾਦੋਂ ਖੂਬ ਰਾਜ ਜਿੱਤੇ ਬਾਦਲ ਚ ਖੂਬ ਪੈਦਾ ਹੋ ਜਾਂਦੀਆਂ ਨਾ ਕਿੰਨੇ ਦਿਨ ਦੀ ਉਮਰ ਹੁੰਦੀ ਉਹਦੀ ਬਸ 30 ਦਿਨ ਉਹਦਾ ਜਦੋਂ ਚੱਲ ਜਾਂਦੇ ਦਿਨ ਖਤਮ ਕੀੜੇ ਪੈਦਾ ਹੋ ਕੇ ਖੂਬ ਰਾਜ ਬੜੀ ਸੋਹਣੀ ਲੱਗਦੀ ਹੈ ਤੂੰ ਤੇਸੇ ਖੜੀ ਉਹ ਤਾਬਲੇ ਤੂੰ ਤਾਂ ਉਹਦੇ ਨੂੰ ਵੀ ਉਤਾਵਲੀਏ ਕਾਲੀ ਪਈ ਹੋਈ ਹੈ ਜਿਵੇਂ ਬਹੁਤ ਛੇਤੀ ਖਤਮ ਹੁੰਦੀ ਹੈ ਉਹਦੇ ਨੂੰ ਵੀ ਛੇਤੀ ਤੇਰਾ ਜਲਦ ਖਤਮ ਹੋ ਜਾਵੇ ਤੇਰੇ ਅੰਦਰ ਜੋ ਛਟਿਆਈ ਹੈ ਤੇਰੇ ਅੰਦਰ ਜੋ ਗਿਆਨ ਨਸ ਕੋਰ ਦਾ ਨਾਉ ਤੇ ਵੀ ਚੇਤੀ ਤੇਰੇ ਕਰ ਗੁਰੂ ਦੇ ਜਿਹੜੇ ਗੁਰੂ ਬਣਾ ਲਿਆ ਮੇਰੇ ਤੇਰਾ ਪਹਿਲਾ ਗਿਆਨ ਸੀ ਉਹ ਵੀ ਟੱਚ ਕਰ ਦੇਣਾ ਹਾਂਜੀ ਜੈਸੇ ਬਾਦੋਂ ਖੂਬ ਰਾਜ ਤੂੰ ਉਤਾਵਲੀ ਰਹਾਓ ਉਹਦੇ ਨਾਲ ਵੀ ਕਾਲੀਏ ਉਹ ਖੂਬ ਕਾਲੀ ਹੋ ਜਾਂਦੀ ਹੈ ਉਹਦੇ ਨਾਲ ਵੀ ਕਾਲੀਏ ਕਾਲਾ ਆਪਣਾ ਅੰਦਰ ਕਾਲਾ ਕਰ ਲੂ ਗਿਆਨ ਉਤਾ ਲੈ ਤੇ ਉਹ ਖਾਣ लायक ਨਹੀਂ ਰਹਿੰਦੀ ਉਹ ਜ਼ਹਿਰੀ ਬਣ ਜਾਂਦੀ ਜੀ ਜੈਸੇ ਕੋਰੰਕ ਨਹੀਂ ਪਾਇਓ ਭੇਜ ਤਨ ਸੁਗੰਧ ਢੁੰਡੇ ਪਰਦੇਸ ਉਹ ਜਿਵੇਂ ਕੋਰੰਕਰ ਬਿਰਕਦੇ ਭੇਦ ਨਹੀਂ ਨਾ ਪਾਇਆ ਵੀ ਸੁਗੰਧੀ ਤਾਂ ਉਹਦੇ ਵਿੱਚ ਹੀ ਆ ਢੁੱਡੀ ਦੇ ਬਿਰਕਦੇ ਢੁੱਡੀ ਚ ਸੁਗੰਧੀ ਪੈਦਾ ਹੋ ਜਾਂਦੀ ਐ ਜਿਹਨੂੰ ਕਸਤੂਰੀ ਕਹਿੰਦੇ ਨੇ ਉਹਨੂੰ ਸੁਗੰਧੀ ਆਉਂਦੀ ਆ ਉਹਨੂੰ ਇਹ ਨਹੀਂ ਪਤਾ ਮੇਰੇ ਅੰਦਰ ਭੱਜਿਆ ਫਿਰਦਾ ਸੁਗੰਧੀ ਢੋਲਦਾ ਕਾਣਾ ਸੁਕਾਂਦੇ ਜੇ ਮੈਂ ਨੀ ਪ੍ਰਗਟ ਨਹੀਂ ਪਾਏ ਹੋ ਤੇ ਜਿਵੇਂ ਗੁਰੰ ਕਰੇ ਇਹ ਨਾ ਭੇਜ ਪਾਇਆ ਸੁਗਦੀ ਦਾ ਸੁਧੀ ਹੈ ਕਿੱਥੇ ਸਰੀਰ ਦੇ ਵਿੱਚ ਆ ਟੁੱੜੇ ਜੋ ਜਿਹਨੂੰ ਟੋੜਨਾ ਉਹ ਤੇਰੇ ਅੰਦਰ ਹੀ ਆ ਪਰਦੇਸ ਟੁੱਟ ਬਾਹਰ ਟੁੱੜਦਾ ਫਿਰਦਾ ਬਾਹਰ ਬਣਾ ਲਿਆ ਗੁਰੂ ਤਾਂ ਉਹ ਸਤਗੁਰ ਤਾਂ ਤੇਰਾ ਅੰਦਰ ਬੈਠਾ ਹੈ ਤੇਰੇ ਸਹ ਬਾਹਰ ਬਣਾ ਲਿਆ ਇਹ ਦੇਖ ਕੇ ਮੋਟਾ ਗਿਆ ਹਾਂਜੀ ਆਪ ਇਸ ਨਹੀਂ ਜਮ ਕੰਕਰ ਕਰੇ ਖਵਾਰ ਅਕਲ ਦਾ ਕਰੇ ਵਿਚਾਰ ਆਪਣੇ ਅੰਦਰ ਆ ਖੁੱਦਰ ਜਿਹੜੀ ਉੱਤਰਾਤਮਾ ਦੀ ਆਵਾਜ਼ ਹੈ ਘਟ ਦੇ ਵਿੱਚ ਰੱਬ ਬੋਲਦਾ ਲੋ ਤਾਂ ਹਿਰਦੇ ਅੱਥੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਜੋ ਕਰੇ ਵਿਚਾਰ ਇਸ ਲਈ ਜਮ ਕੰਕਰ ਕਰੇ ਖਵਾਰ ਉਹਦੇ ਜਮ ਦਾ ਡੰਡ ਕਦੇ ਇੱਦਾਂ ਹੀ ਹੀ ਦੀ ਜਿਹਨੇ ਆਪਣੀ ਉੱਤਰਾਤਮਾ ਦੀ ਵਿਚਾਰ ਕੀਤੀ ਹੈ ਉਜਮਣ ਬਣ ਚਰੇ ਹੈ ਦੀ ਛੋਟ ਮੁਖ ਵਿੱਚ ਹੋ ਗਿਆ ਉਹ ਹਾਂ ਜੀ ਪੁੱਤਰ ਕਲਤਰ ਅਹੰਕਾਰ ਠਾਕੁਰ ਲੇਖਾ ਮੰਗਣਹਾਰ ਜਿਹੜਾ ਪੁੱਤਰ ਇਹ स्त्री ਦਾ ਕਰਦੇ ਨੇ 600 ਰੁਪਏ ਲੇਖਾ ਮੰਗਣਹਾਰ ਤੂੰ ਬਗਮ ਲੱਗਦਾ ਸੀ ਪੁੱਤਰ ਕਲਤਰ ਦਾ ਪੁੱਤਰ ਦੋਨੋਂ ਕਵੀ ਗਾਨ ਤਾਂ ਕਲਤਰ ਕਵੀ ਗਾਨ ਸੀ ਕਾ ਮੈਂ ਕੱਲ ਨਾ ਰੋਜੀ ਰੋਟੀ ਮਿਲਦੀ ਰਿਹਾ ਦਾ ਤੈਦੂਬੀ ਤੂੰ ਐਵੇਂ ਸਾਲਕ ਬਣ ਕੇ ਬਹਿ ਜਾ ਨਰੇ ਕੀ ਦਾ ਸਾਦਰ ਵਿੱਚ ਲੇਖਾ ਮੁੰਦਾ ਵੀ 10 ਆ ਸੂਰ ਤੇਰਾ ਚੜਾਏ ਚੜਿਆ ਸੀ ਤੂੰ ਤਾਂ ਕੇ ਕਹਿੰਦਾ ਤੇ ਜਵਾਬ ਲਈ ਉਹਦਾ ਕਿ ਹਾਂ ਫੇੜੇ ਦਾ ਦੁੱਖ ਸਹੈ ਜੀਓ ਪਾਛੇ ਕਿ ਸਹਿ ਪੀਓ ਪੀਓ ਆ ਜਿਹੜਾ ਦੁੱਖ ਜੀਓ ਸਹ ਰਿਹਾ ਫੇੜੇ ਦਾ ਦੁਖੇੜਾ ਦੋਹਜ ਇਕਤਾ ਦੀ ਰਗੀ ਉਹ ਚਤਰ ਬulti ਇਕਤਾ ਪੱਗ ਹੋਈ ਹੋਈ ਐ ਤੂੰ ਫੇੜ ਹੋ ਜਾਣੀ ਫੇੜੇ ਫੇੜੇ ਕਹਿੰਦੇ ਤੂੰ ਫੇੜ ਹੋਇਆ ਹੋਇਆ ਜਿੱਤ ਮਾਨਾ ਜਿੱਤ ਦੀ ਇਕਤਾ ਪੱਗ ਹੋਈ ਹੋਈ ਐ ਦੁੱਖ ਸਹਿ ਰਹੇ ਉੱਪਰ ਪੀਓ ਪੀਓ ਪਿੱਛੂ ਦਾ ਲੋਟ ਪੀਓ ਪੀਓ ਕਿਹਨੂੰ ਪਕਾਲੇ ਦਾ ਪੀਓ ਨੂੰ ਡਾਢ ਹੋਇਆ ਬੈਠਾ ਨਾਲ ਕਨਾਂ ਡਾਢ ਹੋਇਆ ਬੈਠਾ ਗੁਰਦੇਵ ਤੋਂ ਡਾਢ ਹੋਇਆ ਬੈਠਾ ਬਾਪ ਤੋਂ ਡਾਢ ਹੋਇਆ ਬੈਠਾ ਮੇਰੇ ਬਾਪੂ ਕਿੱਥੋਂ ਆਦਾ ਉਹ ਲੋਟ ਪੈ ਲਈ ਨਾ ਫਾਇਦਾ ਦਾ ਵਿਰੋਧ ਕਰਦਾ ਹੈ ਹਾਂਜੀ ਸਾਧੂ ਕੀ ਜੋ ਲਹੇ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਬਾਪ ਤੇਰਾ ਜਿਹੜਾ ਉਹ ਸਾਧੂ ਆ ਉਹ ਨਹੀਂ ਤੇਰੇ ਨਾਲ ਕਰਦਾ ਦੁੱਖ ਉਹ ਤੇਰੇ ਅੰਦਰ ਬੈਰ ਵੜੋ ਅੰਦਰ ਤੇਰੇ ਖਾਤਰ ਹੁਣ ਵੀ ਬੈਰ ਵੜੋ ਸਾਧੂ ਹੈ ਉਹਦਾ ਸਾਧੂ ਸੁਭਾਅ ਹੈ ਤੇਰੇ ਅੰਦਰ ਤਾਂ ਹੈ ਬੈੜ ਉਹਦੇ ਵਾਸਤੇ ਤੂੰ ਗੱਲ ਨਹੀਂ ਬੋਲਦਾ ਵਰੋਣੋ ਐਸੀ ਤਾਂ ਦੁੱਖ ਹੈ ਚਿੰਤਾ ਹੈ ਦੋ ਦੀ ਗੱਲ ਈ ਬੰਦਾ ਸਰਬ ਕੀ ਜਨਤਾ ਜਸ ਬੁਧ ਵਾਹੇ ਉਹਨੋਂ ਇਸ ਗੱਲ ਦਾ ਦੁੱਖ ਵੀ ਹੈ ਚਿੰਤਾ ਵੀ ਹੈ ਦੋ ਦੀ ਗੱਲ ਈ ਬੰਦਾ ਤੂੰ ਖਤਾ ਖਾ ਇਸ ਕਰਕੇ ਉਹ ਸਾਧੂ ਹੈ ਸਾਧੂ ਕੀ ਜੋ ਲੈਣ ਹੋਟ ਜੋ ਆਪੜੇ ਆਤਮ ਦੀ ਆਪਣੀ ਗੁਰਦੇਵ ਦੀ ਹੋਟ ਲੈਂਦੇ ਨੇ ਗੁਰਦੇਵ ਸਾਧੂ ਉਹਦੀ ਹੋੜ 'ਚ ਰਹਿੰਦੇ ਨੇ ਉਹਦੇ ਨਾਲ ਜੁੜੇ ਰਹਿੰਦੇ ਨੇ तेरे बेटे पाप सब कोट-कोट करोड़ों पाप जेड़े तू कर ले पिछला ता लेखा पाट जउगा कहां नु कर के बाप नहीं करे सा यानी साधु दा विरोध करनो ही पाप है तेरा दा विरोध करना ही पाप है हुक्म दे विच पानी चलनो होना है विरोध करनो पाप है कोट-कोट जो पाप कहां नु पिछले लोग पिछले पाप हो जानगे हां संत शरण जो जन्म है ਆ ਤੇ ਜਨੂਦਲ ਹਾਰ ਠੀਕ ਹੈ ਜੀ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨੀ ਕਾਮ ਆਹੀ ਮੇਰੇ ਉਤੇ ਲੱਛਣ ਲਾਇਏ ਤੇ ਕਿ ਇਹ ਜਮਾਰ ਹੈ ਮੁਕਤੀ ਹੋ ਸਕਦਾ ਇੱਥੇ ਆ ਕੇ ਫੇਰ ਉਹ ਮਾਰਿਆ ਉਹਨੇ ਦਡਾ ਕੇ ਕਹੇ ਰਵਿਦਾਸ ਜੋ ਜਪੈ ਰੋਗ ਕਹਿੰਦੇ ਜੋ ਨਾਮ ਜਪ ਲੈਂਦਾ ਇਸ ਜਾਤ ਨਾ ਜਨੂਬ ਨਾ ਜੋਲ ਦੀ ਕਾਬਲ ਨਾ ਜਾਤ ਦਾ ਮਤਲਬ ਉਹ ਦਾ ਜੋਨ ਵਾਲਾ ਜਨੂਬ ਨਾਲ ਹੈ ਕਿੰਨਾ ਨਾਲ ਬਕਬਲੀ ਬਕਬਲੀ ਹੁਣ ਅਸੀਂ ਲੋਬੀ ਚੱਪਦੇ ਆਂ ਜੱਟ ਵੀ ਹੈਗੇ ਆਂ ਲੋਬੀ ਚੱਪਦੇ ਆਂ ਫਰੀ ਜਲ ਵੀ ਹੈਗੇ ਇਹ ਕੱਲੀਓ ਹੀ ਫਕੀ ਰੂਲ ਹੀ ਹੈ ਰੂਲ ਜਿਹਦੀ ਕੋਈ ਸੁਪਰੀਮ ਕੋਰਟ ਦੀ ਰੂਲਿੰਗ ਹੁੰਦੀ ਹੈ ਜੇ ਜਾਤ ਰਹੂਗੀ ਤਾਂ ਜਨਬ ਰਹੂਗਾ ਤੇ ਜੋਦੀ ਰਹੂਗੀ ਜੇ ਜੋਦੀ ਜੇ ਜਾਤ ਹੈ ਤਾਂ ਜੋਦੀ ਵੀ ਹੈ ਜਨੂਬ ਵੀ ਹੈ ਜੇ ਜਾਤ دوگا تا جوت اور جنم دوے ਨਾਲ جڑے رہن گے تے سکھ جڑی کان کھول کے سن لاند گل اے رولن پرمیشر دی اے کسے نال रविदास دی ਨਾ نہ کسے ہور دی اے درگاہ دی بانی اے रविदास دی بولی کوئی ضرور ہے سجدے پا شاہ نے چڑھاتی اجے نو مٹھا ٹیکدیاں تے ਧਿਆਨ ਨਾਲ ਸੁਣنا سن لین تے جڑے سننا تے پھر جلدی چکی دے کے دیا کبھی ਕੀ ਜਿਵੇਂ ਸਾਬਤ ਰਿਆਲ ਕੋ ਸਾਬਤ ਕੋ ਹੀ ਨਹੀਂ ਰਿਹਾ ਜੇ ਜਾਤ ਜ਼ੋਰ ਜ਼ੋਰ ਨਾਲ ਅਗਲੇ ਇਹਨੂੰ ਲਈ ਲੈਣਾ ਬੁਕਤੀ ਲਈਏ ਤਾਂ ਜਾਤ ਬਾਤ ਅਗੜੀ ਪਊਗੀ ਜਾਤ ਬਾਤ ਦੀ ਬਨੌਤ ਛੱਡਲੀ ਪਊਗੀ ਤੇ ਤੋਂ ਪਊਗਾ ਠੀਕ ਹੈ ਜੀ ਇੱਥੇ ਪ੍ਰਗਤੀ ਦੇ ਸ਼ਬਦ ਦੀ ਸਮਾਪਤੀ